ਸ੍ਰੀ ਲੋਕ ਮਹੱਲਾ ਪੰਜਵਾਂ ਸੱਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁੱਚੁ ਪਾਏ ਦੁਖ ਦਾਲਦ ਭੰਨ ਤਰ ਸੱਬੇ ਜੀ ਸਮਾਲ ਜਿਹਦੇ ਜੀ ਦੇ ਸਾਰਿਆਂ ਨੂੰ ਆਪਣੇ ਲਾਲ ਲਾ ਲੈ ਆਪਣੀ ਮਿਹਰ ਕਰ ਇਹਨਾਂ ਤੇ ਸਾਰਿਆਂ ਤੇ ਆਪਣੀ ਕਿਰਪਾ ਕਰ ਜਲਦ ਜਲੰਦਾ ਰੱਖ ਲੈ ਆਪਣੀ ਕਿਰਪਾ ਦਾ ਇਹ ਸਾਰੇ ਜਾਣਦੇ ਨੇ ਇਹਨਾਂ ਤੇ ਕਿਰਪਾ ਕਰ ਇਹਨਾਂ ਨੇ ਦੁਰ ਤਰੀਕ ਨਾਲ ਇਹ ਗੁਜਾਤ ਹੈ ਆਪਣੇ ਲੋਲ ਲਾਲ ਹੈ ਦੁੱਧ ਸਾਰੇ ਜੀ ਅਨਪਾਣੀ ਕੁਝ ਉਪਾਏ ਦੁੱਖ ਦਾਲਦ ਪਦਦਾਰ ਅਨਪਾਣੀ ਇਹਨਾਂ ਦਾ ਜਿਹੜਾ ਸਰੀਰ ਕਰਕੇ ਵੀ ਹੈ ਬਾਕੀ ਆਤਮਾ ਕਰਕੇ ਵੀ ਹੈ ਐਸਾ ਪੈਦਾ ਕਰ ਜਿਹੜੇ ਇਹਨਾਂ ਦੇ ਦੁੱਖ ਦਾਲਦ ਦੇ ਸਾਰੇ ਦੂਰ ਹੋ ਜਾਣ ਪਦਦਾਰ ਖਤਮ ਜਾਂਦਣ ਕਰ ਜਾਣ ਦੁੱਖ ਦੇ ਟੁੱਟ ਜਾਣ ਸੁਖ ਰੋ ਸਾਰੇ ਟੁੱਟ ਜਾਣ ओय सुनी दातार होई सिष्ट ठार लेवो कंठ लगाए अपदा सब अरदास सुनी दाता दाता ने अरदास सुणी कोई सिष्ट गुण आराणा पैर के है दीते आराणा पैर के विस्पृट होया है सिष्ट सारी सिष्ट शांत होगी ਅਰਦਾਸ ਸੁਣ ਲਈ ਜੀ ਵੀ ਅਰਦਾਸ ਸੁਣ ਲਈ ਦਾਤਾਰ ਦੇ ਉਹਦਾ ਹਿਰਦਾ ਠਰ ਗਿਆ ਛਾਂ ਉਹਦੇ ਫਿਰਦੇ ਦੀ ਜਿਹੜੀ ਅਰਦਾਸ ਕੀਤੀ ਹੈ ਔਰ ਲਗਾਏ ਅਬਦਾ ਸਭ ਜੀਦਾ ਹਿਰਦਾ ਠੰਡਾ ਹੈ ਆਪਣੇ ਕੰਢ ਨਾਲ ਲਾਓ ਤੇ ਅਬਦਾ ਉਹਦੀ ਦੂਰ ਕਰ ਠੀਕ ਅਬਦਾ ਸਭ ਦੀ ਦਿੱਤਾ ਗਈ ਹੋ ਮਾਨਕ ਨਾਮ ਧਿਆਇ ਪ੍ਰਭ ਕਾ ਸਫਲ ਕਰ ਜਿਹਦੇ ਨਾਮ ਧਿਆਲੇ ਆ ਜਿਹਦਾ ਨਾਮ ਚ ਧਿਆਨ ਉਹ ਪ੍ਰਭ ਦਾ ਘਰ ਬਣ ਗਿਆ ਸਭੰਤਾ ਪਾਲੀ ਤੇ ਪ੍ਰਭ ਦਾ ਹੀ ਘਰ ਹੈ ਪ੍ਰਭ ਕਾ ਸਫਲ ਕਰ ਉਹ ਪ੍ਰਭ ਕਾ ਹੋ ਗਿਆ ਆਪਣੇ ਘਰ ਦੇ ਘਰ ਕੋਈ ਆ ਸਭ ਦਾ ਹੀ ਘਰ ਹੈ ਸਭ ਦਾ ਸਭ ਘਰ ਹੈ ਸਫਲ ਕਰ ਜਿਹੜਾ ਇਹ ਘਰ ਚੱਲਿਆ ਗਿਆ ਉਹ ਸਮਝੇ ਸਫਲਤਾ ਹੋ ਗਈ ਉਹ ਜਗਤ ਮਨੋਂ ਛੁੱਟ ਗਿਆ पास होके चला गया कह लो आ इठे दा इफ्तार पास कर गया हो कौन सा साहब इफ्तार की रह रह रह है। जी है ते कल ना कौन सा कल साहब तरदा ही है हुण 23000 ਹੁਕਮ ਕੀਤਾ ਕਰਤਾਰ ਰਿਜਕ ਉਪਾਏ ਨਗਲਾ ਠਾਂਡ ਪਈ ਸੰਸਾਰ ਗੁੱਥੇ ਮੇਗ ਵਹਾੜ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਕਿੰਨੇ ਮੇਗ ਵਹਾੜੇ ਗੁੱਥੇ ਨੇ ਫੱਟਾ ਨੇ ਵੀ ਉਦੋਂ ਛੇ ਪਰ ਲਾਈ ਹੈ ਪੰਜਵੇਂ ਪਾਛੇ ਵੇਲੇ ਜੇ ਨੇ ਸਾਦੀ ਤੋਂ ਮੇਗ ਕਿਤੇ ਗੁੱਥੇ ਸੱਤੇ ਗਲ ਵੀ ਗੱਲ ਆਉਂਦੀ ਹੈ ਉਹ ਗੁੱਥੇ ਮੇਗ ਵਹਾੜ ਹੁਕਮ ਕੀਤਾ ਕਰਤਾਰ ਕਰਤਾਰ ਦਾ ਹੁਕਮ ਹੋ ਗਿਆ ਇਕੱਠੇ ਬੋਲਣ ਲੱਗੇ ਕਿੱਦਾਂ ਜਾਨੀ ਦੇ ਜੀ ਕੋ ਬਾਹਨ ਅਗਲਾ ਅੱਗੇ ਤੋਂ ਅੱਗੇ ਦਾ ਰਿਕਾਰਡਿੰਗ ਤੋਂ ਅੱਗੇ ਦੀ ਨੇ ਗਾਹ ਤੋਂ ਗਾਹ ਦੀ ਗੱਲ ਬ੍ਰੀਤੀਆਂ ਦੱਸ ਰਹੇ ਨੇ ਸੰਸਾਰ ਸਾਰੇ ਪੈ ਗਈ ਵੀ ਹਾਂ ਕੋਈ ਨਹੀਂ ਆਦਮੀ ਆਦਮੀ ਜ਼ਿਆਦਾ ਵੀ ਬੋਲ ਸਕਦੇ ਨੇ ਕੋਈ ਜ਼ਰੂਰੀ ਨਹੀਂ ਵੀ ਕੋਈ ਆਦਮੀ ਬੋਲੇ ਪਰਮੇਸ਼ਰ ਦੇ ਖੇਡਾ ਕਿ ਸਾਡੀ ਦੁਨੀਆ ਨੂੰ ਤੇ ਗਿਆ ਹਾਂ ਤਨਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਪਰਿ ਕਿਰਪਾ ਆਪਣੀ ਪੱਛੇ ਸਿਰਜਣਹਾਰ ਤਨਮਨ ਹਰਿਆ ਹੋਇਆ ਸਿਮਰਤ ਅਦਮਾ ਪਾਲ ਜਿਹਨੇ ਵੀ ਅਦਮਾ ਪਾਲੂ ਸਬੰ ਲਿਆ ਉਹਨੂੰ ਕੱਲ ਲਿਆ ਹਰਿਆ ਹੋ ਗਿਆ ਜਿਹਨੇ ਨਹੀਂ ਕੀਤਾ ਉਹਦਾ ਨਹੀਂ ਹੋਇਆ ਇੱਥੇ ਹੀ ਸੀ ਜਿਹਨਾਂ ਨੇ ਨਹੀਂ ਹੋਇਆ ਉਹ ਵੀ ਇੱਥੇ ਜਿਹੜੇ ਦਫ ਹੋ ਗਏ ਉਹ ਵੀ ਇੱਥੇ ਹੀ ਪਰਿ ਕਿਰਪਾ ਪ੍ਰਭ ਆਪਣੀ ਸੱਤ ਜੈ ਸਰਜਨ ਹਾਰ ਉਹਨਾਂ ਦੇ ਸੱਤ ਜੈ ਸਰਜਨ ਹਾਰ ਨੇ ਕਿਰਪਾ ਕਰਤੀ ਜਿਨਾਂ ਨੇ ਉਹਨੂੰ ਸੁਣ ਲਿਆ ਉਹਨਾਂ ਨਾਲ ਹੋ ਗਿਆ ਹਾਂਜੀ ਕੀਤਾ ਲੋੜੇ ਸੋ ਕਰੇ ਨਾਨਕ ਸਦ ਬਲਹਾਰ ਕੀਤਾ ਲੋੜੇ ਸੋ ਕਰੇ ਪਰਮੇਸ਼ਰ ਦਾ ਜਿਹੜਾ ਕੀਤਾ ਲੋੜਦਾ ਕਰ ਸਕਦਾ ਹੈ ਜੀ ਵੀ ਜਿਹੜਾ ਕੀਤਾ ਲੋੜੇ ਕਰ ਸਕਦਾ ਜੇ ਆਪਣੇ ਘੋੜਾ ਮਾਰ ਨਾਲ ਤੈਰ ਵੀ ਮਾਰ ਸਕਦਾ ਜੇ ਆਪਣਾ ਆਪ ਦਾ ਘੋੜਾ ਇਹ ਸਵਾ ਸਕਦਾ ਕੀਤਾ ਲੋੜੇ ਸੋ ਕਰੇ ਚਾਹੇ ਆਪਣਾ ਬਗਾਲ ਲਵੇ ਅੱਗਾ ਚਾਹੇ ਸੰਭਾਲ ਲਵੇ ਜੀਵ ਦੇ ਵੀ ਹੱਥ ਕੇ ਸੋ ਕਰੇ ਧਾਨਕ ਸਾਧ ਬਲੇਹਾਰ ਧਾਨਕ ਇਹਦੇ ਬਲੇਹਾਰੇ ਆ ਇਹਦੇ ਇਹ ਵੀ ਅੱਗਾ ਆਪਣਾ ਚਾਹੇ ਨਹੀਂ ਇਹਦੇ ਸੰਭਾਲਣਾ ਤਾਂ ਨਰਕਾਂ ਨੂੰ ਜਾਣਾ ਉੱਥੇ ਵੀ ਜਾ ਸਕਦਾ ਇਹਦੀ ਆਪਣੀ ਰਜ਼ਾ ਦੀ ਗੱਲ ਹੈ ਹਾਂਜੀ ਵੱਡਾ ਆ ਵੱਡੀ ਵਡਿਆਈ ਗੁਰ ਸ਼ਬਦੀ ਵੇਖ ਵਿਗਸਿਆ ਅੰਤਰ ਸ਼ਾਂਤ ਆਈ ਵੱਡਾ ਆਗਮ ਹੈ ਜਿਹੜਾ ਵੱਡਾ ਕੌਣ ਇੱਕ ਵੱਡਾ ਸਭ ਤੋਂ ਕੋਈ ਵੱਡਾ ਇੱਕ ਜਿਹੜਾ ਹੈ ਸਾਬਤ ਸੂਰਤ ਹੈ ਜਿਹੜਾ ਸਤਾਰਥ ਉਹਦੇ ਉਹਦੇ ਤੇ ਹੀ ਹੈ ਉਹ ਵੱਡਾ ਇੱਕ ਤੋਂ ਗਾਂ ਦੂਈ ਤਾਂ ਫਰਮਾਇਆ ਹੈ ਵੱਡਾ ਆਪ ਆਗਮ ਹੈ ਉਹ ਆਗਮ ਗੁਰੂ ਗ੍ਰੰਥੀ ਤਾਂ ਬੜੀ ਗੱਲ ਹੈ ਗੁਰੂ ਗ੍ਰੰਥੀ ਨੇ ਤਾਂ ਉਹਨੂੰ ਹਰ ਜਾ ਕੇ ਰੱਖਤਾ ਸਮਾਂ ਕਿੰਨੀਆਂ ਮੱਤਾ ਬਣਾਤੀਆਂ ਦੁਨੀਆਂ ਦੇ ਵਿੱਚ ਅਗਭਜ ਹੈ ਵੱਡੀ ਵਡਿਆਈ ਉਹਦੀ ਵਡਿਆਈ ਹੈ ਉਹਦੀ ਵਡਿਆਈ ਵੀ ਵੱਡੀ ਹੈ ਸਰਸਾਰ ਦੇ ਵਿੱਚ ਭਗਤ ਤੋਂ ਵੱਡਾ ਕੋਈ ਨਹੀਂ ਸੀ ਜਿੱਤੇ ਵੀ ਚਾਹੇ ਵਿਦਵਾਨ ਨੇ ਬੜੇ ਬੜੇ ਪੰਡਤ ਰਾਜੇ ਦੇ ਜਿਹੜੇ ਪੁਰਾਣੋ ਸਾਰਿਆਂ ਨੂੰ ਵੱਡਾ ਕੌਣ ਨੂੰ ਦਿਆਂ ਗਿਆ ਵੱਡਾ ਭਗਤਾ ਵੱਡਾ ਤਾਂ ਸੂਰ ਚਦਰਪਤੀ ਰਾਜਾ ਜੇਈ ਵੱਡੇ ਮੰਨੇ ਜਾਂਦੇ ਨੇ ਭਗਤ ਦੇ ਆਪਣੀ ਵਡਿਆਈ ਤਾਂ ਸੰਸਾਰ ਕਰਦਾ ਉਹਨੇ ਜਿਹੜੀ ਵਡਿਆਈ ਕੀਤੀ ਹੈ ਉਹ ਵੱਡੀ ਹੈ ਉਹ ਵਡਿਆਈ ਕਿਸੇ ਆਪਣੀ ਨਹੀਂ ਕਰਦਾ ਕਿਸੇ ਹੋਰ ਦੀ ਕਰਦਾ ਉਹ ਪਰਮੇਸ਼ਰ ਦੀ ਵਡਿਆਈ ਕਰਦਾ ਹਾਂ ਜੀ ਇੱਥੇ ਲੱਗੀ ਹੈ ਠੀਕ ਹੈ ਜੀ ਟਿੱਪੀ ਲੱਗਣੀ ਚਾਹੀਦੀ ਹੈ। ਕਿ ਪੀਓ theta ਹੈ ਨਹੀਂ ਸੀ ਪੜਨਾ ਤੈਨੂੰ ਹਾਂ ਕੰਪੀਅਰ ਟਿੱਪੀ ਹੋਵੇ ਚਾਹੀਦੋ ਹੋਵੇ। ਖਤ ਲਿਖਣ ਟਿੱਪੀ ਕਿਤੇ ਹੈ ਹੀ ਨਹੀਂ। ਕਿਤੇ ਲਾਤੀ ਇਹਨਾਂ ਨੇ ਬੈਲੀਆਂ ਨੇ ਕਿਤੇ ਆਪਣੀ ਆਪਣੀ ਮौज ਗੁਰ ਸ਼ਬਦੀ ਵੇਖ ਵਿਗਸਿਆ ਅੰਤਰ ਸ਼ਾਂਤ ਆਈ। ਗੁਰ ਸ਼ਬਦੀ ਵੇਖ ਵਿਗਸਿਆ। ਗੁਰ ਸ਼ਬਦੇ ਆ ਜਿਹੜਾ ਗੁਰੂ ਦੇਸ ਇਹਦੇ ਨਾਲ ਦਰਸ਼ਨ ਹੋਇਆ ਵੇਖ ਵੇਖ ਕੇ ਬਿਰਸਾ ਖੁਸ਼ ਹੋ ਗਿਆ ਪਰ ਜਾਣਦਾ ਇਹ ਜਿਹਨੂੰ ਸਮਝ ਆ ਗਈ ਕੁਰਬਾਨੀ ਦੀ ਉਹਨਾਂ ਦਰਬੀ ਸ਼ੁਰੂਤੀ ਆ ਗਈ ਵੇਖ ਕੇ ਆ ਖੁਸ਼ੀ আর ਖੇੜਾ ਆ ਗਿਆ ਤੇ ਸ਼ਾਂਤੀ ਆ ਗਈ ਹਾਂਜੀ ਆਪੇ ਆਪ ਵਰਤਦਾ ਆਪੇ ਹੈ ਭਾਈ ਆਪ 나ਥ ਸਭ ਨੱਥੀ ਹਨ ਹੁਕਮ ਚਲਾਈ ਤਬ ਆਪਣੇ ਆਪ ਵਰਤਦਾ ਇੱਕੇ ਸਾਰੇ ਚਾਹੇ ਸੰਤਾਜ ਵਰਤੇ ਦੋ ਹੋ ਕੇ ਆਪੇ ਹੈ ਭਾਈ ਭਾਈ ਬਣ ਕੇ ਚਾਹੇ ਵਰਤੇ ਚਾਹੇ ਫਿਰ ਦੂਏ ਪਾਸੇ ਵਰਤੇ ਆਪ ਨਾਥ ਬਣ ਕੇ ਵਰਤੇ ਚਾਹੇ ਸਭ ਦਿੱਰ ਉਹ ਵੀ ਇੱਕ ਹੋ ਕੇ ਨਾਥ ਹੈ ਸਾਰਿਆਂ ਦੇ ਨਤ ਭਾਈ ਹੋਈ ਹੈ ਹੁਕਮ ਤੁਣਾ ਦਾ ਇਹ ਕਦਾਈ ਹੁਕਮ ਸਭ ਹੁਕਮ ਚਲਾਈ ਚਾਹੇ ਨਾਲ ਹੁਕਮ ਚਲਾ ਰਹੇ ਚਾਹੇ ਇੱਥੇ ਦੋ ਹੋ ਕੇ ਦੋ ਭਾੜ ਹੋ ਕੇ ਆਯਾ ਦੇ ਬਿੱਤ ਕੱਲ ਰਿਹਾ ਹੈ ਫੈਦ ਉਹਦੀ ਪੱਤੀ ਹੋ ਗਈ ਇੱਕੋਈ ਹੈ ਜੀ ਸਭ ਆਪੇ ਆ ਆਪੇ ਹੈ ਭਾਈ ਜਾਂ ਭਾਈ ਕਹਿੰਦੇ ਦੋ ਹੋਗੇ ਉਪਾਈ ਤੇ ਤਰਮਾਨ ਭਾਈ ਦੇ ਅੱਛਾ ਜੀ ਉਹ ਵੀ ਕਿਲੇ ਇਹ ਵੀ ਕਾਹ ਪਰ ਇੱਕ ਦੇ ਵਿੱਚ ਕਵੀ ਹੈ ਫਰਕ ਸੁੱਤਾ ਜਾਗਦਾ ਵੀ ਸੁਪਨਾ ਦੇਖਦਾ ਇਹ ਉਹ ਜਾਗਦੇ ਨੇ ਸਾਰੇ ਇਹ ਆ ਤਾਂ ਫਿਰ ਸੁਲ ਸੁਪਨਾ ਦੇਖਦਾ ਇੰਦਾ ਹੀ ਫਰਕ ਹੈ ਜਾਗੂਗਾ ਜਿਹੜਾ ਉੱਥੇ ਚੱਲਿਆ ਜਾਊਗਾ ਫਰਕ ਕੋਈ ਨਹੀਂ ਹੈਗਾ ਜਾਗਣ ਦਾ ਸੌਣ ਦਾ ਫਰਕ ਹੈ ਸਾਰਿਆਂ ਦਾ ਸਾਰੇ ਉਹਦੇ ਵਿੱਚ ਨੇ ਨੱਥੀਆਂ ਨੇ ਸਭ ਨੱਥੀਆਂ ਨੇ ભગવાન્ਦਰ સાબકો ઠીક હે જી નાનક હર ભાવે સો કરે સબ ચલ ਹਰ ਭਉ ਹੈ ਉਹ જીવ ਕਰਦੇ ਨੇ ઉਦੀ ਰਜ਼ਾ ਚ ਚੱਲਦੇ ਨੇ ਤੇ ਅਖਰ ਕਹ ਲੋ ਵੀ ਇਹ ਹુકਮ ਪਉਦਾ ਜੇ ਹਰ ਹੁਕਮ ਕਹਿ દઈએ ਫਿਰ ਸਾਰਾ ਸੰਸਾਰ ਹੀ ਚੱਲਦਾ ਉਹਦੇ ਨਾਲ ਹਰ ਜ਼ਾਬਤ ਸੂਰਤ ਦਾ ਸਾਰਥਰ ਹੈ ਕਿ ਹੁਕਮ ਨੇ ਵਿੱਚ ਸਮਾਇਆ ਹੋਇਆ ਹੈ ਫਿਰ ਹਰ ਅੰਦਰ ਦਾ ਕੀ ਬਾਤਾਂ ਨਾ ਅੰਦਾਜ਼ ਕਰਾਵੇ ਹਰ ਅੰਦਰ ਬਾਤਾਂ ਜਿਹ ਸੁਨਾਰੀਆਂ ਜਿਹੜਾ ਉਹ ਵਿੱਚੇ ਸਮਾਇਆ ਹੋਇਆ ਠੀਕ ਹੈ ਜੀ ਆ ਇੱਥੇ 36ਵੀਂ ਦੀ ਸਮਾਪਤੀ ਹੈ ਜੀ ਨਾਲੇ ਸਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਤੋ ਨੀ ਗਾਵਣੀ ਇਹਦੀ ਵੀ ਸਮਾਪਤੀ ਹੈ ਹਾਂਜੀ 36 ਪੌੜੀਆਂ ਸੀ ਵਾਰ ਵਿੱਚ ਤੇ ਇੱਕ ਪੌੜੀ ਪੰਜਵੇਂ ਪਾਸ਼ਾ ਦੀ ਸੀ ਬਾਕੀ ਸਭ ਚੌਥੇ ਪਾਸ਼ਾ ਦੀ ਸੀ ਹਾਂਜੀ